ਅਮਦਨੀ ਨੀ ਸਬਦਾਤ ਬਖਾਨੋ ਜਾਚਰ ਕਹਿ ਨਾਇਕ ਪਦ ਠਾਨੋ ਸਤਿ ਸਰਬਦ ਕੋ ਬਹੁ ਰੂਚਾਰੋ ਨਾਮ ਤੁਮਕ ਕੇ ਸਗਲ ਵਿਚਾਰੋ ਹਰ ਆਦ ਉਚਾਰਨ ਕੀਦਾ ਜਾਚਰ ਕਹਿ ਨਾਇਕ ਪਦ ਦੀਜੈ ਸਤਿ ਸਰਬਦ ਕੋ ਬਹੁਰ ਬਖਾਨੋ ਨਾਮ ਤੁਮਕ ਕੇ ਸਗਲ ਪਛਾਨੋ ਬਾਰਦ ਨੀ ਸਬਦਾਤ ਬਖਾਨੋ ਜਾਚਰ ਕਹਿ ਨਾਇਕ ਪਦ ਠਾਨੋ ਸਤਿ ਸਰਬਦ ਕੋ ਬਹੁ ਰੂਚਾਰੋ ਨਾਮ ਤੁਮਕ ਸਭ ਹੀ ਵਿਚਾਰੋ ਨਦਨੀ ਆਦ ਉਚਾਰਨ ਕੀਜੈ ਜਾ ਚਰ ਕਹ ਨਾਇਕ ਪਦ ਦੀਜੈ ਸਤਰ ਸ਼ਬਦ ਕੋ ਬਖਾਨੂ ਨਾਮ ਤੁਖ ਕੇ ਨੈਨੀ ਸ਼ਬਦ ਸੋ ਮੁਖਤਿ ਆਦ ਉਚਾਰਿਐ ਜਾ ਚਰ ਕਹ ਨਾਇਕ ਪਦ ਪੁੰਦੈ ਢਾਰਿਐ 700 ਸ਼ਬਦ ਕਹ ਕੇ ਅੰਤ ਬਖਾਨੀਐ ਹੋ ਸਕਲ ਤੁਖ ਕੇ ਨਾਮ ਚਤੁਰ ਚਿਤ ਜਾਣੀਐ ਸਰਤਨ ਸ਼ਬਦ ਸੋ ਮੁਖਤਿ ਆਦ ਬਖਾਨੀਐ ਜਾ ਚਰ ਕਹ ਨਾਇਕ ਪਦ ਪਾਛੇ ਠਾਨੀਐ ਸਤਰ ਸਬਦ ਕੋ ਤਾਕੇ ਅੰਤੁ ਉਚਾਰਿਐ ਹੋ ਸਕਲ ਤੁਪਕ ਗੇ ਨਾਮ ਪ੍ਰਵੀਨ ਵਿਚਾਰਿਐ ਨਾਦ ਨਿਮੁਖਤੇ ਸਬਦੁ ਉਚਾਰਨ ਜਾ ਚਰ ਕਹਿ ਨਾਇਕ ਪਦ ਬਹੁ ਰੋਂਦੀ ਦੀਐ ਸਤਰ ਸਬਦ ਕੋ ਤਾਕੇ ਅੰਤੁ ਵਖਾਨੀ ਆਇ ਹੋ ਸਕਲ ਤੁਪਕ ਗੇ ਨਾਮ ਚਤਰ ਚਿਤ ਜਾਨੀਐ ਜਲਨੀ ਮੁਖਤੇ ਆਦ ਉਚਾਰਨ ਕੀਤੀਐ ਜਾ ਕਹਿ ਨਾਇਕ ਪਦ ਪਾਛੇ ਦੀਦੀਐ ਸਤਰ ਸਬਦ ਕੋ ਤਾਕੇ ਅੰਤੁ ਹੋ ਸਕਲ ਤੁਪਕ ਨਾਮ ਸੋ ਮੰਤਰ ਵਿਚਾਰਿਐ ਆਜ ਰੰਗਨ ਸ਼ਬਦੋ ਚਾਰੂ ਜਾਣ ਕੈ ਜਾ ਨਾਇਕ ਪਦ ਬਹਰੋ ਠਾਨ ਕੈ ਸੱਤਰ ਸੋਖਤ ਕੋ ਤਾਕੇ ਅੰਤੋ ਚਾਰਿਐ ਹੋ ਸਕਲ ਤੁਪਕ ਕੇ ਨਾਮ ਸੁਮੰਤਰ ਵਿਚਾਰਿਐ ਆਦ ਕਰ ਸ਼ਬਦੋ ਚਾਰੋ ਬਕਤਰ ਤੇ ਜਾ ਚਰ ਪਦ ਉਤਰੋ ਚਿਤ ਤੇ ਸਤਰ ਸਬਦ ਕੋ ਤਾਕੇ ਅੰਤ ਬਖਾਨੀ ਆਇ ਹੋ ਸਕਲ ਤੁਪਕ ਕੇ ਨਾਮ ਸਬੂਧ ਬਖਾਨੀਐ ਛੇਨ ਨੀ ਸ਼ਬਦਾਂ ਦਾ ਉਚਾਰਨ ਕੀਦੀਐ ਜਾ ਚਰ ਕਹਿ ਨਾਇਕ ਪਦ ਬੌਰੋ ਦੀਦੀਐ ਸਤਰ ਸਬਦ ਕੋ ਤਾਕੇ ਅੰਤ ਬਖਾਨੀ ਆਇ ਹੋ ਸਕਲ ਤੁਪਕ ਕੇ ਨਾਮ ਪ੍ਰਵੀਰ ਪੁਛਾਨੀਐ ਬ੍ਰਿਛ ਕੰਦਨ ਨੀ ਆਦ ਬਖਾਨੋ ਜਾਣ ਕੈ ਜਾ ਚਰ ਕਹਿ ਨਾਇਕ ਪਦ ਬੌਰ ਪ੍ਰਮਾਨ ਕੈ ਸਤਰ ਸਬਦ ਕੋ ਤਾਕੇ ਅੰਤ ਬਖਾਨੀ ਆਇ ਹੋ ਸਕਲ ਤੁਪਕ ਕੇ ਨਾਮ ਚਤਰੁ ਪਹਿਜਾਨੀਐ ਦੋਹਰਾ जाल रस सननी आद कह जाचर पद कह अंत छतर शब्द कह तुमक के निकस है नाम अनंत कृत अर्नी पद आद कह जाचर चरनाथ उचार सत्र उच्चर कर तुके लीजो नाम सुधार चौपाई करार कुंदनी आद बखानो जाचर चर कह नायक पद ठानो सत्र शब्द को भोर पुनीजए नाम तुफंग चीन चित लिजए ਗਰਾਰੀ ਆਰਨੀ ਆਤਮਖਾਨੋ ਜਾਤਰ ਕਹਿ ਨਾਇਕ ਪਦ ਧਾਨੋ ਸਤਰ ਸਬਦ ਕੋ ਬਹੁ ਰੂਚਾਰੋ ਨਾਮ ਤੁਖ ਕੇ ਸਗਲ ਵਿਚਾਰੋ ਕਲੂ ਨਾਸਣੀ ਆਤਮ ਨਿਜੈ ਜਾਤਰ ਕਹਿ ਨਾਇਕ ਪਦ ਦਿਜੈ ਸਤਰ ਸਬਦ ਤੇ ਅੰਤੂ ਚਰੀਐ ਨਾਮ ਤੁਪਕ ਕੇ ਸਗਲ ਵਿਚਰੀਐ ਅੜਿਨ ਗੰਗਨ ਪਦ ਕੋ ਪ੍ਰਥਮ ਉਚਾਰਨ ਕੀਦੀ ਐ ਜਾਚਰ ਕਹਿ ਨਾਇਕ ਪਦ ਬਹੁ ਰੋ ਦੀਦੀ ਸਬਦ ਕੋ ਥਾਕੇ ਅੰਤ ਮਖਾਨੀ ਆਹੋ ਸਗਲ ਤੁਪਕ ਕੇ ਨਾਮ ਪ੍ਰਵੀਨ ਪਛਾਨੀਐ ਜੋ ਬਈ जनवरी पद को आद उचारो जा चर कह नायक पद डारो सत्र सुखद को बौर फनिजे ना तूफान चीन चेत लिजे अड़ेल बाग इर्थनी पद को आद बखानी है जा चर कह नायक पद बौर ठानी ਸਤਿ ਸਬਦ ਕੋ ਤਾਂ ਕੇ ਅੰਤ ਚਾਰਿਐ ਹੋ ਸਗਲ ਤੁਪਕ ਕੇ ਨਾਮ ਪ੍ਰਵੀਨ ਵਿਚਾਰਿਐ ਚਉਪਈ ਜਟ ਨਿਨੁ ਪਦ ਕੋ ਆਦ ਜਾ ਚਰ ਕਹ ਨਾਇਕ ਪਦ ਧਰੀਐ ਸਤਿ ਸਬਦ ਕੋ ਬਹੁਰ ਬਖਾਨੋ ਨਾਮ ਤੁਪਕ ਕੇ ਸਗਲ ਪਰਮਾਨੋ ਨਦੀ ਰਾਟਰੀ ਨੇ ਆਦ ਬਖਾਨੋ ਜਾ ਚਰ ਕਹ ਪਤਿ ਸਬਦ ਪਰਮਾਨੋ ਸਤਿ ਸਬਦ ਕੋ ਬਹੁਰ ਪਿਨੀਜੈ ਨਾਮ ਤੁਖੰਗ ਜਾਣ ਜੀ ਲੀਜੈ ਪੀਖਮ ਜਨਨੇ ਨੇ ਆਦ ਬਖਾਨੋ ਜਾ ਚਰ ਕਹ ਪਤਿ ਸਬਦ ਪਰਮਾਨੋ नाम तुपक के सबहिं नहीं है या मैं कछु भेद नहीं कहियै नदी ईश्रन में आध बिचरियै जाचर कह नायक पद दरियै सत्र शब्द को बौर बखानो नाम तुपक के सकल पहचानो नदी राजने ने आध बखानो जाचर कह पद शब्द प्रमाणो सत्र शब्द बौर मुग भाख नाम तुहंग चीन चित ਨਾ ਦੇ ਨਾਇਕ ਨਹੀਂ ਆਦ ਬਖਾਨੋ ਜਾ ਚਰ ਕਹ ਪਦ ਸਬਦ ਪਰਮਾਨੋ ਸਤਰ ਸਬਦ ਬਹਰੋ ਤੇ ਦੀਜੈ ਨਾਮ ਤੁਮਾਂ ਚਿਤ ਲੀਜੈ ਸਰ ਤੇ ਸ੍ਰਿਣਿ ਨੇ ਜਾ ਚਰ ਕਹ ਨਾਇਕ ਪਦ ਦਿਜੈ ਸਤਰ ਸਬਦ ਕੋ ਬਹਰ ਬਖਾਨੋ ਨਾਮ ਤੁਪਕ ਕੇ ਸਗਲ ਪਛਾਨੋ ਸਰਤਾ ਵਰਨ ਨੇ ਆਦ ਵਿਚਰੀਐ ਜਾ ਚਰ ਕਹ ਨਾਇਕ ਪਦ ਬਰੀਐ ਸਤਰ ਸਬਦ ਕੋ ਬਹਰ ਬਖਾਨੋ ਨਾਮ ਤੁਪਕ ਕੇ ਸਭ सर तेन्द्रनिन आद उचारो जा चर कह पति पद दय डारो सत्र सौद को बोर बखानो नाम तुप के सब जीव जानो दोहरा सरता निरपनिन बकतर ते प्रथमा करो उचार जा चर पद कह सत्र कह नाम तुमक दीए धार अड़ेलम आज तरंगनि राजनि सब जा चर कह नायक पद पुन दय ਸਤਰ ਸਬਦ ਕੋ ਤਾਕੇ ਅੰਤ ਬਖਾਨੀਐ ਹੋ ਸਕਲ ਤੁਪਕ ਕੇ ਨਾਮ ਪ੍ਰਬੀਨ ਪਛਾਨੀਐ ਨਦੀ ਨਿਰਪਨਨੀ ਮੁਖਤੇ ਆਤ ਬਖਾਨੀਐ ਜਾ ਚਰ ਕਹਿ ਨਾਇਕ ਪਦ ਬੌਰ ਪਰਮਾਨੀਐ ਸਤਰ ਸਬਦ ਕੋ ਤਾਕੇ ਅੰਤ ਉਚਾਰੀਐ ਹੋ ਸਕਲ ਤੁਪਕ ਕੇ ਨਾਮ ਚਤਰ ਚਿਤ ਧਾਰੀਐ ਚਉ ਪਈ ਆਦੇ ਜਮਨਨੀ ਸਬਦ ਉਚਾਰੋ ਜਾ ਕਹਿ ਨਾਇਕ ਪਦ ਧਾਰੋ ਸਤਰ ਸਬਦ ਕੋ ਬੌਰ ਪਨਿਜੈ ਨਾਮ ਤੁਫੰਗ ਜੀਨ ਚਿਤ ਲਿਜੈ ਕਾਲਿੰਦਨਨੀ ਆਦ ਉਚਰੀਐ ਜਾ ਚਰ ਕਹੈ ਨਾਇਕ ਪਦ ਰੀਐ ਸਤਰ ਸ਼ਬਦ ਕੋ ਬੌਰ बखਾਨੋ ਸਭ ਸ੍ਰੀ ਨਾਮ ਕੇ ਜਾਨੋ ਕਿਸ਼ਨ ਬਲਭਿਨ ਆਦ ਬਿਨਿ ਦੇ ਜਾ ਚਰ ਨਾਇਕ ਪਦ ਦੀਜੈ ਸਤਰ ਸ਼ਬਦ ਕੋ ਬੌਰ बखਾਨੀਐ ਸਭ ਸ੍ਰੀ ਕੇ ਜਾਨੀਐ ਬਸ ਦੇਵ ਚ ਬਲ ਭੰਨੇ ਆਖੋ ਜਾ ਚਰ ਕਹੈ ਨਾਇਕ ਪਦ ਰਖੋ ਸਭ ਸ੍ਰੀ ਨਾਮ ਕੇ ਜਾਨੋ ਜਾ ਮੈਂ ਭੇ ਦੇਖ ਨਹੀਂ ਮਾਨੋ ਅੜਿਲ ਸਕਲ ਨਾਮ ਬਸ ਦੇਵਕੇ ਆਦ ਉਚਾਰਿਐ ਜਾ ਬਲਬਨੀ ਤਾ ਪਾਛੈ ਪਦ ਢਾਰਿਐ ਜਾ ਚਰ ਕਹਿ ਤੇ ਸ਼ਬਦ ਬੋਰਤੇ ਭਾਖਿਐ ਚੀਨ ਤੁਪਕ ਕੇ ਨਾਮ ਚਤਰ ਚਿਤ ਰਾਖਿਐ ਚਉਪਈ ਸ਼ਾਮ ਬਲਬਾ ਆਦ ਬਖਾਨੋ ਜਾ ਚਰ ਕਹਿ ਨਾਇਕ ਪਦ ਠਾਨੋ ਸਤਰ ਸੋਦ ਗੋਵਰ ਬਖਾਨੋ ਸਭੋ ਸ੍ਰੀ ਨਾਮ ਤੁਪਕ ਕੇ ਜਾਨੋ ਤਰ ਬਲਬਾ ਬਖਾਨੋ ਜਾ ਚਰ ਕਹਿ ਪਤ ਸ਼ਬਦ ਪਰਮਾਨੋ ਸਤਰ ਸਬਦ ਕੋ ਬਹਰ ਪਣੀ ਜੈ ਜਾਨੋ ਨਾਮ ਤੁਮਕ ਕੋ ਲੀਜੈ ਬਾਪੁਰ ਘਰ ਬਲਵਾ ਪਰਮਾਨੋ ਜਾਚਰ ਕਹਿ ਪਦ ਸਬਦੈ ਠਾਨੋ ਸਤਰ ਸਬਦ ਕੋ ਬਹਰ ਉਚਰੀਐ ਸਭ ਜੀ ਨਾਮ ਤੁਕ ਕੇ ਧਰੀਐ ਬੰਸੀ ਤਾਰ ਕਰਨੇ ਨੂੰ ਪਗ ਜੈ ਜਾਚਰ ਸਬਦ ਪਣੀ ਸਤਰ ਸਬਦ ਕੋ ਬਹਰ ਮੁਖਾਨੋ ਸਭ ਜੀ ਨਾਮ ਤੁਮਕ ਪਹਿਚਾਨੋ ਬਿਸ ਇਸ ਬਲਵਾ ਬਾਦ ਪਦ ਦੀਜੈ ਜਾਚਰ ਕਹਿ ਪਦ ਸਬਦ ਪਣੀ ਸਤਰ ਸਬਦ ਕੋ ਬਹੁਰ ਬਖਾਨੋ ਸਭ ਸ੍ਰੀ ਨਾਮ ਤੁਪਕ ਕੇ ਜਾਨੋ ਬਿਸ ਅਸੀਸ ਰਣੀ ਆਕਮਣਿ ਜੈ ਦਾਤਰ ਕੈ ਪਾਤੀ ਪਦ ਪੁਨ ਦਿਜੈ ਸਤਰ ਸਬਦ ਕੋ ਬਹੁਰ ਬਖਾਨੋ ਸਭ ਸ੍ਰੀ ਨਾਮ ਤੁਪਕ ਕੇ ਜਾਨੋ ਜਦ ਨਾਇਕ ਨਾਇਕਾ ਬਖਾਨੋ ਜਾਤਰ ਕੈ ਪਦ ਸਬਦ ਪ੍ਰਮਾਨੋ ਤਾਕੇ ਅੰਤ ਸਤਰ ਪਦ ਦੀਜੈ ਨਾਮ ਤੁਫੰਗ 3 ਚਿਤ ਲੀਜੈ ਅੜੇਲ ਦੁਆਰ 33 ਬੰਧ ਭਾਯ ਆਦ ਜਾਚਰ ਨਾਇਕ ਪਦ ਕੋ ਪੁਨ ਦੈ ਡਾਰੀਐ ਸਤ ਸੋਦ ਕੋ ਤਾਕੇ ਅੰਤ ਬਖਾਨੀਐ ਹੋ ਸਕਲ ਧੁਪਕੇ ਨਾਮ ਪ੍ਰਵੀਨ ਪਛਾਨੀਐ ਜਾ ਦੋ ਰਾਏ ਬੰਦਵਾ ਆਦ ਬਖਾਨੀਐ ਜਾ ਚਰ ਕਹਿ ਨਾਇਕ ਪਦ ਬੌਰ ਪਰਮਾਨੀਐ ਸਤ ਸੋਦ ਕੋ ਤਾਕੇ ਅੰਤ ਭਣੀ ਹੋ ਸਕਲ ਧੁਪਕੇ ਨਾਮ ਚਤਰ ਲਖ ਦਵਾਰ ਕੇ ਅੰਦਰ ਵੱਲ ਭਿਨ ਉਚਾਰਨ ਕੀ ਦੀਐ ਜਾ ਤਰ ਕਹਿ ਨਾਇਕ ਪਦ ਪਾਛੇ ਦੀ ਦੀਐ ਸੱਤਰ ਸਬਦ ਕੋ ਤਾਕੇ ਕੇ ਅੰਤ ਬਖਾਨੀਐ ਹੋ ਸકલ ਤੁਪਕ ਕੇ ਨਾਮ ਪ੍ਰਵੀਨ ਉਚਾਨੀਐ ਦਵਾਰ ਕੇ ਇਸ ਵੱਲ ਭਨ ਸੋਵਾਦ ਬਖਾਨੀਐ ਜਾ ਤਰ ਕਹਿ ਨਾਇਕ ਪਦ ਬੌਰ ਪਰਮਾਨੀਐ ਸਤਰ ਸਬਦ ਕੋ ਤਾ ਕੇ ਅੰਤੁ ਉਚਾਰਿਐ ਹੋ ਸਕਲ ਤੁਪਕ ਕੇ ਨਾਮ ਚਤਰ ਚਿਤ ਧਾਰਿਐ ਚਉ ਪਈ ਦਵਾਰ ਕੇ ਨਿ ਆਤ ਬਖਾਨੋ ਜਾ ਚਰ ਕਹ ਪਦ ਸਬਦ ਪਰਮਾਨੋ ਸਤਰ ਸਬਦ ਕੋ ਬਹੁ ਰੂਚਰੀਐ ਸਾਬ ਸ੍ਰੀ ਨਾਮ ਤੁਕ ਕੇ ਧਰੀਐ ਜਦ 나ਥਨ ਨੀ ਆਤ ਪਨੀ ਜਾਤਰ ਕਹ ਨਾਇਕ ਪਦ ਦੀਜੈ ਸਤਰ ਸਬਦ ਕੋ ਬਹੁ ਰਵਖਾਨੋ ਸਾਬ ਸ੍ਰੀ ਨਾਮ ਤੁਕ ਕੇ ਜਾਨੋ ਦਵਾਰ ਵਤੀਸ ਨਿੰਨ ਪਦ ਭਾਖੋ ਜਾ ਚਰ ਕਹਿ ਨਾਇਕ ਪਦ ਰਾਖੋ 700 ਸੋਦ ਕੋ ਬੋਰ ਬਖਾਨੋ ਸਭ ਸ੍ਰੀ ਨਾਮ ਤੁਮਕ ਕੇ ਜਾਨੋ ਅੜਿਨ ਦਵਾਰ ਨਾਇਕ ਨਿੰਨ ਆਦ ਵਿਚਾਰਿਐ ਜਾ ਚਰ ਕਹਿ ਕੈ ਪੁਨ ਨਾਇਕ ਪਦ ਧਾਰਿਐ 700 ਸੋਦ ਕੋ ਤਾਕੇ ਅੰਤ ਬਖਾਨੀਐ ਉਹ ਸਗਰ ਤੁਮਕ ਕੇ ਨਾਮ ਪ੍ਰਵੀਨ ਪਛਾਨੀਐ ਚੋਬੀ ਦਵਾਰ ਕਾ ਧਨ ਨੇ ਆਦ ਬਖਾਨੋ ਜਾ ਚਰ ਕਹਿ ਪਦ ਸਬਦ ਪਰਮਾਨੋ ਸਤਿ ਸਬਦ ਕੋ ਬੌਰ ਪੁਣੀਜੈ ਨਾ ਤੁਪਾਂ ਗਥੀਨ ਚਿਤ ਲੀਜੈ ਦਵਾਰ ਕੇਂਦਰ ਨੇਨੇ ਆਦ ਵਿਚਰੀਐ ਜਾ ਚਰ ਕਹ ਪਤਿ ਸਬਦ ਸੋ ਧਰੀਐ ਸਤਿ ਸਬਦ ਕੋ ਅੰਤ ਬਖਾਨੋ ਸਭ ਸ੍ਰੀ ਨਾਮ ਤੁਪਕ ਕੇ ਮਾਨੋ ਦਵਾਰ ਬਤੇਸ ਸ੍ਰੀ ਨੀ ਆਦ ਬਖਾਨੋ ਜਾ ਚਰ ਕਹ ਪਾਤੀ ਸਬਦ ਸੋ ਧਾਨੋ ਸਤਿ ਸਬਦ ਕੋ ਭੌਰ ਉਚਰੀਐ ਸਭ ਸ੍ਰੀ ਨਾਮ ਤੁਪਕ ਕੇ ਧਰੀਐ जद वेसनी आद उच्चारण कीजे जातर कह नायक पद दीजे सत्र शब्द को बौर बखानो सब श्री नाम तुख पहचानो द्वारवती नायक निन भाग कहो जातर कह पाद कह राखो सत्र शब्द को बौर बखानो सब श्री नाम तुख के जानो जगते श्री निन आद पणि जय जातर कह नायक पद दीजे सत्र शब्द को बौर बखानो सब श्री नाम तुख के जानो हडिल आलक दंद भुजा बल बिन आदमी खानि है जा चर कह नायक पद बहुर प्रमाणि है सत्र शब्द को ठाके अंत उचारी है ओ सकल तुपक के नाम सो मंत्र बिचारी है हली प्रात निन आध बखानन की ज है जा चर बलियाนุज निन आद बखानो जा चरकै पद शब्द प्रमाणो सत्र शब्द कहो बौर फनिजे नाम तुहंग तीन चित लिजे बल पईन नी बखानो जा चरकै पद शब्द प्रमाणो सत्र शब्द को बौर रो कहियो सा श्री नाम तुभक के लहीयो ਰੋਹਣੇ ਅਪਰਾਤਨ ਨੀ ਭਾਖੋ ਜਾ ਤਰ ਕਹਿ ਨਾਇਕ ਪਦ ਰਾਖੋ ਸਤਰ ਸਬਦ ਕੋ ਬੌਰ ਬਣੀ ਜਾਏ ਸਾ ਸ੍ਰੀ ਨਾਮ ਤੁਪਕ ਲੈ ਲਿਜੈ ਬਲ ਭੱਦਰ ਪ੍ਰਾਤਨ ਨੀ ਆਦ ਉਚਾਰੋ ਜਾ ਤਰ ਕਹਿ ਨਾਇਕ ਪਦ ਧਾਰੋ ਸਤਰ ਸਬਦ ਕੋ ਬੌਰ ਬਖਾਨੋ ਸਾ ਸ੍ਰੀ ਨਾਮ ਤੁਕ ਕੇ ਜਾਨੋ ਖਾਨ ਅਨ ਨੀ ਆਦ ਬਖਾਨੀ ਐ ਜਾ ਤਰ ਕਹਿ ਨਾਇਕ ਪਦ ਬੌਰ ਪਰਮਾਨੀ ਐ ਸਤਰ ਸਬਦ ਕੋ ਧਾਕੇ ਅੰਤ ਉਚਾਰਿਐ ਉਹ ਸਗਲ ਤੁਪਕ ਕੇ ਨਾਮ ਸੁਬੁੱਧ ਵਿਚਾਰਿਐ ਕਾਮ ਪਾਲ ਅਨਜਨਨੀ ਆਤਮਨੀ ਦੀ ਆਜਾ ਤਰ ਕਹ ਕਾ ਨਾਇਕ ਪਦ ਦੀ ਦੀ ਜਾਏ ਸਬਦ ਕਹਤਾ ਕੇ ਅੰਤ ਉਚਾਰਿਐ ਉਹ ਸਗਲ ਤੁਪਕ ਕੇ ਨਾਮ ਸੁ ਮੰਤਰ ਵਿਚਾਰਿਐ ਹਲ ਆਯੁਧ ਅਨਜਨਨੀ ਆਦ ਬਖਾਨੀਐ ਜਾ ਤਰ ਕਹ ਨਾਇਕ ਪਦ ਬੌਰ ਪਰ ਅਰ ਪਦ ਤਾ ਕੇ ਅੰਤ ਸੁ ਕਬ ਕਹ ਦੀ ਦੀ ਸਗਲ ਤੁਪਕ ਕੇ ਨਾਮ ਜਾਣ ਜੀ ਲੀ ਰਿਉ ਤੇ ਰਾਮ ਨੇ ਅਨੁਜਨਨੀ ਆਦ ਬਖਾਨੀਐ ਜਾਚਰ ਕਹਿ ਨਾਇਕ ਪਦ ਬਹੁਰ ਪਰਮਾਨੀਐ ਸਤਰ ਸ਼ਬਦ ਕੋ ਤਾਕੇ ਅੰਤ ਸੋ ਦੀਜੀਐ ਹੋ ਸકલ ਤੁਕ ਕੇ ਨਾਮ ਜਾਣ ਜੀ ਲੀਤੀਐ ਚਾਉ ਪਈ ਰਾਮ ਅਨੁਜਨਨੀ ਆਦ ਉਚਾਰੋ ਜਾਚਰ ਕੈ ਪਤ ਪਦ ਦੈ ਡਾਰੋ ਸਤਰ ਸ਼ਬਦ ਕੋ ਬੌਰ ਬਖਾਨੋ ਸਾ ਸ੍ਰੀ ਨਾਮ ਬਲਦੇਵ ਅਨਜਨਨੀ ਆਦ ਉਚਾਰੋ ਜਾ ਚਰ ਕੈ ਆਦ ਉਚਾਰਿਐ ਜਾ ਚਰ ਕਹਿ ਨਾਇਕ ਪਦ ਪੁੰਦੈ ਧਾਰਿਐ ਸਤਿ ਸਬਦ ਕੋ ਤਾਕੇ ਅੰਤ ਬਖਾਨੀਐ ਹੋ ਸਗਲ ਤੁਮਕ ਤ੍ਰਿਣਾ ਵਰਤ ਅਰਨੇ ਨੇ ਸਬਦ ਆਦ ਬਖਾਨੀਐ ਜਾ ਚਰ ਕੈ ਕੈ ਪੁੰਨਾਇਕ ਪਦ ਧਾਨੀਐ सत्र शब्द को ताके अंतुचारिय हो सक तुपके नाम सुमन्त्र विचारिय केस आंतक ने ने आद उच्चारण कीजिय जातर कह कह पुन नायक पद दीजिय सत्र शब्द को ताके अंतुचारिय हो सक तुपके नाम सुमन्त्र विचारिय बकी आंतक ने ने आद उच्चारण कीतिया जातर कह कह पुन नायक पद दीजिय सत्र शब्द को ताके अंतुचारिय हो सक तुपके नाम सुबुद्ध विचारिय पाते नागने ने आद उचारो जानकै जातर कहकै कह पुना एक पद ठाणकै सत्र शब्द को ताकै अंत बखानी है ओ सकल तुबुक के नाम प्रवीण प्रमाणि है सकटासर हननेन शब्द दाद बणी दी है जातर कह पाछे नायक पद दीजियै सत्र शब्द को ताकै अंत बखानी है ओ सकल तुबुक के नाम सो ज्ञान पहचानि ਜੋ ਭਈ ਮੁਰ ਅਰਨਿਨਿ ਸ਼ਬਦਾਤਮਨੀ ਜੈ ਜਾਚਰ ਕਹਿ ਨਾਇਕ ਪਦ ਵਿਜੈ ਸਤਰ ਸ਼ਬਦ ਕੋ ਬੌਰ ਬਖਾਨ ਸਭ ਸ੍ਰੀ ਨਾਮ ਤੁਮਕ ਕੇ ਜਾਨ ਨੋ ਨਰਕਾਂਤਕ ਨਿਨੇ ਆਦ ਬਖਾਨ ਨੋ ਪਦ ਸ਼ਬਦ ਪਰਮਾਨ ਨੋ ਸ਼ਬਦ ਕੋ ਸਗਲ ਤੁਮਕ ਕੇ ਨਾਮ ਕੀਜੈ ਆਦ ਨਰਕ ਹਾਰਨਿ ਪਦ ਭਾਕੋ ਜਾਚਰ ਕਹਿ ਨਾਇਕ ਪਦ ਰਾਖੋ ਸਤਰ ਸ਼ਬਦ ਕੋ ਬੌਰ ਬਖਾਨ ਸਭ ਸ੍ਰੀ ਨਾਮ ਤੁਮਕ ਕੇ ਜਾਨ ਨੋ शत्रु काइन न नि आध पणिजै जाचर कह नायक पद दिजै शत्रु शब्द को गौरब खानहौ सब श्री नाम तुपक पहचानहौ अढेल मोर मर्द नेने पाद आद उच्चारण कीजै जाचर कह कह पुन नायक पद दीजै शत्रु शब्द को ताके अंत पणि दीजै हो सकल तुपक के नाम छत्र लहली दीजै चौपाई मदसूड निन आद पणिजै ਜਾਤਰ ਕਹਿ ਨਾਇਕ ਪਦ ਵਿਜੈ 700 ਸ਼ਬਦ ਕੋ ਬਹੁਰ ਬਖਾਨੋ ਸਭ ਸ੍ਰੀ ਨਾਮ ਤੁਪਕ ਕੇ ਜਨਵ ਅਰਿਲ ਮਦ ਦੁੰਦਨੀ ਮੁਖਤੇ ਆਤਮਨੀ ਜਿਐ ਪੁਨ ਸਭ ਦੇਵਿੰਦਰ ਕਹਿ ਸ਼ਬਦ ਕੋ ਤਾਕੇ ਅੰਤ ਬਖਾਨੀਐ ਉਹ ਸਗਲ ਤੁਪਕ ਕੇ ਨਾਮ ਪਰਬੀਨ ਪਰਮਾਨੀਐ ਮਦਨਾਸਨਨੀ ਮੁਖਤੇ ਆਤਮਖਾਨੀਐ ਜਾਤਰ ਕਹਿ ਕੈ ਪੁਨ ਸਭ ਦੇਸਰ ਪ੍ਰਮਾਨੀਐ ਸ਼ਬਦ ਕੋ ਤਾਕੇ ਅੰਤੁ ਚਾਰੀਐ ਉਹ ਕਾਲ ਜਮਨ ਅਰਨਿਨ ਸਬਦਾਤ ਬਖਾਨੀਐ ਜਾ ਚਰ ਕਹਿ ਕੈ ਪੁਰ ਨਾਇਕ ਪਦ ਠਾਨੀਐ ਸਤਰ ਸੋਦ ਕੋ ਤਾਕੇ ਅੰਤੂ ਚਾਰੀਐ ਉਹ ਸਗਲ ਤੁਕ ਕੇ ਨਾਮ ਸੁਮੰਤਰ ਵਿਚਾਰੀਐ ਨਰਕ ਅਰਨਿਨ ਮੁਖ ਤੇ ਆਤਮ nijia ਜਾ ਚਰ ਕਹਿ ਕੈ ਪੁਰ ਨਾਇਕ ਪਦ ਦੀਜੀਐ ਸਤਰ ਸੋਦ ਕੋ ਤਾਕੇ ਅੰਤ ਬਖਾਨੀਐ ਉਹ ਸਗਲ ਤੁਕ ਕੇ ਨਾਮ ਸੁਬੁੱਧ ਪਛਾਨੀਐ ਕੰਸ ਕੇਸ ਕਰਖਨਨੀ ਆਦ ਬਖਾਨ ਹੀ ਜਾ ਚਰ ਕਹਿ ਕੈ ਪੁਰ ਨਾਇਕ ਪਦ ਠਾਨ ਹੀ ਸਤਿ ਸਬਦ ਕੋ ਤਾਕੇ ਅੰਤ ਉਚਾਰਿਆ ਹੋ ਸਗਲ ਤੁਪਕ ਕੇ ਨਾਮ ਸਬੁੱਧ ਵਿਚਾਰਿਆ ਬਾਸ ਦਿਵੈਸਨਨਨੀ ਆਦਿ ਭਨੇਜੀਐ ਜਾਤਰ ਕਹਿ ਕਹਿ ਪੁੰਨਾਇਕ ਪਦ ਦਿੱਜੀਐ ਸਤਿ ਸਬਦ ਕੋ ਤਾਕੇ ਅੰਤ ਬਖਾਨੀਐ ਹੋ ਸਗਲ ਤੁਪਕ ਕੇ ਨਾਮ ਸਬੁੱਧ ਪਰਮਾਨੀਐ ਅਨਕ ਦੁੰਦ ਭੇਸਨਨੀ ਆਦ ਉਚਾਰਿਆ ਜਾਤਰ ਕਹਿ ਕਹਿ ਪਦ ਦਾਰੀਐ ਸਤਿ ਸਬਦ ਕੋ ਤਾਕੇ ਅੰਤ ਬਖਾਨੀਐ ਹੋ ਸਗਲ ਤੁਪਕ ਕੇ ਨਾਮ ਸੋ ਮੰਤਰ ਪਛਾਨੀਐ रसन रक्षनिनी आद शब्द को उपाखिया जातर कहकै पुन नायक पद राखीए सत्र शब्द को ताके अंत उचारिया हो सकल तुपके नाम छत्र चित धारिया नारायण नी आद उच्चारण की दीए जातर कहकै राज शब्द पुन दी दीए सत्र शब्द को ताके अंत बखानीए हो सकल तुपके नाम सुबुद्ध प्रमाणिया बारा लाइन नी मुक्त आत्मणी दीए ਜਾਤਰ ਕਹਿ ਕੈ ਨਾਥ ਪੌਰ ਪਦ ਦੀ ਜੀਐ ਸਤਰ ਸਬਦ ਕੋ ਤਾਕੇ ਅੰਤ ਬਖਾਨੀਐ ਹੋ ਸਗਲ ਤੁਭ ਕੇ ਨਾਮ ਸੁਭੁਧ ਪਰਮਾਨੀਐ ਨਾਰਾ ਲੈਨੀ ਆਦ ਉਚਾਰਨ ਕੀਜੀਐ ਜਾ ਚਰ ਕਹਿ ਪਦ ਸਬਦ ਬਹੁਰ ਤੇ ਦੀਜੀਐ ਸਤਰ ਸਬਦ ਕੋ ਤਾਕੇ ਅੰਤ ਬਖਾਨੀਐ ਉਹ ਸਗਲ ਤੁਭ ਕੇ ਨਾਮ ਪ੍ਰਵੀਨ ਪਰਮਾਨੀਐ ਨਾਰ ਕੇ ਨੇ ਆਦ ਉਚਾਰਨ ਕੀਜੀਐ ਜਾ ਚਰ ਕਹਿ ਪੁਨ ਨਾਇਕ ਪਦ ਦੀਜੀਐ ਸਤਰ ਸਬਦ ਕੋ ਤਾਕੇ ਅੰਤੋ ਚਾਰੀਐ ਹੋ ਸਗਲ ਤੁਭ ਕੇ ਨਾਮ ਪ੍ਰਵੀਨ ਵਿਚਾਰੀਐ ਜਲਵਾਸਨਨੀ ਆਦ ਉਚਾਰਨ ਕੀ ਦੀਐ ਜਾਤਰ ਕਹਿ ਕਹਿ ਨਾਅ ਸਬਦ ਪੁਨ ਦੀ ਦੀਐ ਸਤਰ ਸਬਦ ਕੋ ਧਾਕੇ ਅੰਤੋ ਹੋ ਸਗਲ ਕੇ ਨਾਮ ਸੁਮੰਤਰ ਵਿਚਾਰਿਐ ਚਉਪਈ ਜਲ ਕੀਤਨਨੀ ਆਦ ਬਖਾਨੋ ਜਾਤਰ ਕਹਿ ਪਦ ਸਬਦ ਪਰਮਾਨੋ ਸਤਰ ਸਬਦ ਕੋ ਬੋਰਪਣੀ ਜੈ ਸਾਖ ਸ੍ਰੀ ਨਾਮ ਤੁਪਕ ਲਖ ਲਿਜੈ ਅੜੇਲ ਜਲਵਾਸਨਨੀ ਆਦ ਬਖਾਨਨ ਕੀ ਦੀਐ ਜਾਤਰ ਕਹਿ ਕਹਿ ਨਾਅ ਸਬਦ ਪੁਨ ਦੀ ਜੀਐ ਸਤਸਰ ਸਬਦ ਕਹਤਾ ਕੇ ਅੰਤ ਬਖਾਨੀ ਆਏ ਹੋ ਸકલ ਤੁਕਗੇ ਨਾਮ ਪ੍ਰਵੀਨ ਪਰਮਾਨੀ ਆਏ ਚਾਉ ਪਈ ਜਲ ਧਾਮਨ ਨੀ ਆਤ ਬਖਾਨੋ ਜਾ ਤਰ ਕਹਿ ਪਦ ਸਬਦ ਪਰਮਾਨੋ ਸਤਸਰ ਸਬਦ ਕਹ ਬੌਰ ਪਣੀਜੈ ਸਭ ਸ੍ਰੀ ਨਾਮ ਤੁਮਕ ਲਖ ਲਿਜੈ